ਇਹ ਜੋ ਚਮਕਦੇ ਸਿਤਾਰੇ ਆਪ ਵੇਖ ਰਹੇ ਹੋ ਜਿਹੜੀ ਪਤਾ ਨਹੀਂ ਸ਼ਾਇਦ ਇਸ ਜਨਮ ਦੀ ਤਫਸੀਆ ਜੋ ਹੈ ਉਹ ਹੈ ਪਿਛਲੇ ਕਿੰਨੇ ਜਨਮਾਂ ਦੀ ਘਾਲਣਾ ਕਰਕੇ ਇਹ ਆਰਟ ਜੋ ਮਿਲਿਆ ਹੈ ਇਹ ਵੀ ਇਸ ਕਲਾ ਨੂੰ ਹਾਸਲ ਕਰਨ ਲਈ ਪੰਜਾਬ ਦੀ ਧਰਤੀ ਤੇ ਅੱਜ ਇਸ ਮੁੱਚੀ ਨਾਮ ਤਾਰੀਕੋਂ ਉਹਨਾਂ ਦਾ ਕੰਟਰੀਬਿਊਸ਼ਨ ਟੂ ਕੀਪ ਦ ਆਰਟ ਜਿਹੜਾ ਸਿੱਖਾਂ ਦੇ ਵਿੱਚ ਇਸ ਕਲਾ ਨੂੰ ਬਣਾਈ ਰੱਖਣ ਲਈ ਜਿਹੜਾ ਉਹਨਾਂ ਦਾ ਕੰਟਰੀਬਿਊਸ਼ਨ ਹੈ ਉਹ ਪੁਲਾਇਆ ਨਹੀਂ ਜਾ ਸਕਦਾ ਸੰਸਦਾਂ ਦੇ ਮੁਖੀ ਸਤਗੁਰੂ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਪਤਨੀ ਕਰੋੜਾਂ ਲੱਖਾਂ ਰੁਪਇਆ ਲਗਾ ਕੇ ਇਸ ਪ੍ਰੋਜੈਕਟ ਨੂੰ ਕਿ ਜਿਹੜਾ ਆਰਟ ਹੈ ਜਿਹੜਾ ਇੱਕ ਘਰਾਂ ਵਿੱਚ ਬੱਜ ਕੇ ਰਹਿ ਗਿਆ ਸੀ ਉਹਨੂੰ ਸਾਰੀ ਦੁਨੀਆ ਤੱਕ ਫਲਾਉਣ ਲਈ ਜਿਹੜਾ ਮਿਸ਼ਨ ਤਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਸੀ ਉਸ ਮਿਸ਼ਨ ਨੂੰ ਸਾਰਾ ਪ੍ਰਾਲਾ ਕੀਤਾ ਹੈ ਅਗਲੇ ਪ੍ਰੋਗਰਾਮ ਵਿੱਚ ਰਾਗ ਕੌਂਸੀ ਕਾਂੜਾ ਆਪ ਜੀ ਸੁਣ ਰਹੇ ਹੋ ਜਾਂਦਿਆਂ ਹੁਆ ਤੇ ਵਾਪਸ ਦੀ ਸ਼੍ਰੀ ਕਿਰਨਪਾਲ ਸਿੰਘ ਜੀ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਿ ਉਹ ਸੰਤੂਰ ਗਏ ਬੜੇ ਨਾਮੀ ਦਾਮੀ ਉਸਤਾਦ ਇੱਥੇ ਤਬਲੇ ਦੇ ਸਰਦਾਰ ਰਿਪੂ ਦਮਨ ਸਿੰਘ ਜੀ ਜਿਹੜੇ ਇੱਥੇ ਬ੍ਰਾਜਮਾਨ ਨੇ ਉਹਨਾਂ ਤੋਂ ਤਬਲੇ ਦੀ ਸਿੱਖਿਆ ਲਈ ਜਿ ਯੂਰਪ ਦੀ ਸਾਰੀ ਕਮਿਊਨਿਟੀ ਵਿੱਚ ਇੱਕੋ ਇੱਕ ਕਲਾਕਾਰ ਨੇ ਸੰਤੂਰ ਦੇ ਰਾਜ ਅਕੈਡਮੀ ਏਸ਼ੀਅਨ 뮤직 ਵਿੱਚ ਵੀ ਇਹਨਾਂ ਦਾ ਬੜਾ ਹੀ ਕੰਟ੍ਰਿਬਿਊਸ਼ਨ ਹੈਡ ਆਫ ਰਿਦਮ ਡਿਪਾਰਟਮੈਂਟ ਹਨ ਸਾਡੇ ਆਓ ਇਹਨਾਂ ਤੋਂ ਆਪਾਂ ਸਰਵਣ ਕਰਦੇ ਹਾਂ ਰਾਗ ਕੌਸੀ ਕਾਂੜਾ ਕਿਵੇਂ ਮਨ ਦੀ ਗੱਲ ਦਾ ਇਸਹਾਰ ਕਿੰਨੀ ਡੀਟੇਲ ਤੇ ਕਿੰਨੇ ਵਿਸਥਾਰ ਨਾਲ ਕੀਤਾ ਜਾ ਸਕਦਾ ਹੈ ਇਹਦੀ ਮਿਸਾਲ ਆਪ ਜੀ ਆਪਣੇ ਕੰਨੀ ਸਰਵਣ ਕਰਕੇ ਕਰ ਲੈਣਾ